sidum se ala game changers in the house baby this one blow my this one blow my shoes maut nal gudiya sakri balliye jiva har pal jo akhiri balliye maut nal gudiya sakri balliye jiva har pal jo akhiri balliye dalran de nal je pa phull rendiyan ਲਵੈਟਰਾਂ ਦੀ ਆ ਫਕੀਰੀ ਬੱਲੀ ਆ ਰੋਕੇ ਆ ਕਦੇ ਨਹੀਂ ਆ ਝੋਕੇ ਆ ਕਦੇ ਨਹੀਂ ਮਾੜੀ ਕਹੀਂ ਕਦੇ ਨਹੀਂ ਸੁਣੀਆਂ ਕਰੀਦੀ ਨਹੀਂ ਤੇਰ ਪੂਰੀ ਬਾਬੇ ਦੀ ਆ ਮੇਰੀ ਜੱਟ ਜੁੱਤੀ ਥੱਲੇ ਰੱਖੇ ਦੁਨੀਆਂ ਕਰੀਦੀ ਨਹੀਂ ਤੇਰ ਪੂਰੀ ਬਾਬੇ ਦੀ ਆ ਮੇਰੀ ਜੱਟ ਜੁੱਤੀ ਥੱਲੇ ਰੱਖੇ ਦੁਨੀਆਂ ਮਾਰਨੇ ਦਾ ਕੋਈ ਬਹੁਤਾ ਸ਼ੌਂਕ ਨਹੀਂ ਮੇਰਾ موسی ਕਹਾ ਇੱਕ ਠੋਗਨੀਆ ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਂਕ ਨਹੀਂ ਪਿੰਡ ਮੇਰਾ موسی ਕਹਾ ਇੱਕ ਪਰੌੜੀ ਆ ਜਿਉਹੀ ਲੋਕ ਨਹੀਂ ਰੋਕੂ ਕਿਹੜਾ ਮੰਜ਼ਲਾ ਐ ਜੀਵ ਮੇਰੀ ਕਿਸਮਤ ਯੋਨੇ ਖੁਣੀਆਂ ਕਰੀਦੀ ਨਹੀਂ ਤੇਰ ਪੂਰੀ ਪਾਪੇ ਦੀ ਅਮਰੀਕਾ ਤੇ ਯੋਤੀ ਥਲੇ ਰੱਖੇ ਦੁਨੀਆ ਕਰੀਦੀ ਪਾ ਪੇ ਦੀ ਹੈ ਮੇਰੀ ਜੱਟ ਜੁੱਤੀ करा ਪੁੱਛ ਤੇਰੇ ਸ਼ਹਿਰਾਂ ਕਰਾ ਕੱਟ ਜੁੱਤੀ ਥਲੇ ਰੱਖਾਂ ਵਾ ਲੈਦਾ ਉਹਨੂੰ ਚੱਕ ਜੋ ਚੱਕੇ ਵਾਲੀ ਆ ਕਮ ਸਾਰੇ ਕਿਤੇ ਰੌਣ ਪਰ ਮੁੰਡਾ ਪੂਰਾ ਰਾਈਡ ਕਰਾ ਫਾਇਕ ਵੇਖ ਵੇਖ ਬੇਰੀ ਜਿੱਥੇ ਥੱਲੇ ਜਿੱਥੇ ਥੱਲੇ ਵੈਰੀ ਸਾਰੇ ਜਿੱਥੇ ਥੱਲੇ ਕਿੱਥੇ ਚੱਲੇ ਕਿੱਥੇ ਚੱਲੇ ਮੈਨੂੰ ਹੁਣ ਬਿਨਾ ਦੱਸੇ ਹਾ ਹੁਣ ਵੇਖਦਾ ਜ਼ਮਾਨਾ ਨਾ ਮਾਰੇ ਲਾਈਫ ਸਟਾਈਲ ਨੀ ਦਿਲ ਦੇ ਨਾ ਮਾਰੇ ਕਰਦੇ ਪੈਲਨੀ ਆ ਅਣਖਾ ਨਾ ਜੋਣਾ ਲਾਈਫ ਸਟਾਈਲ ਨੀ ਅੱਖਾਂ ਸਾਵੇਂ ਖੜਾ ਮੈਨੂੰ ਦੇਖ ਫੋਕਰੇ ਟਾਈਨ ਵਨ ਵਨ ਕਰ ਦਿੰਦੇ ਡੈਲਨੀ ਆ ਖੁੱਲੇ ਸ਼ੇਰਾ ਵਾਂਗੂ ਆ ਜਿਉਂਦੇ ਜ਼ਿੰਦਗੀ ਅਸੀਂ ਆਪਣੀਆਂ ਰਾਹਾਂ ਚੁਣੀਆਂ ਕਰੀਦੀ ਨਹੀਂ ਤੇਰ ਪੂਰੀ ਬਾਬੇ ਦੀਆਂ ਮੇਰ ਜੱਟ ਜੁੱਤੀ ਥੱਲੇ ਰੱਖੇ ਦੁਨੀਆਂ ਕਰੀਦੀ ਨਹੀਂ ਤੇਰ ਪੂਰੀ ਬਾਬੇ ਦੀਆਂ ਮੇਰ ਜੱਟ ਜੁੱਤੀ ਥੱਲੇ ਰੱਖੇ ਦੁਨੀਆਂ ਹੋ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨਹੀਂ ਉਂਝੇ ਲੋਕ ਨਾ ਕਿਸੇ ਦੇ ਮਤਨੀਆ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨਹੀਂ ਉਂਝੇ ਲੋਕ ਨਾ ਕਿਸੇ ਦੇ ਮਤਨੀਆ ਇੱਥੇ ਜਜ਼ਬਾ ਕੋਈ ਚੀਜ਼ ਔਖੀ ਨਹੀਂ ਉਹ ਇੱਥੇ ਜਿੱਤਣੀ ਆ ਸੱਚੇ ਦਿਲੋਂ ਸਭ ਦੀ ਸਪੋਰਟ ਕਰੀਏ ਨਾ ਕਦੇ ਗਲਤ ਵੇਉ ਤਾਂ ਬੁਣੀਆਂ ਕਰੀਦੀ ਨਹੀਂ ਤੇਰੇ ਪੂਰੀ ਪਾਪੇ ਦੀ ਅਮਰੀਕਾ ਤੇ ਯੁੱਤੀ ਥੱਲੇ ਰੱਖੇ ਦੁਨੀਆਂ ਕਰੀਦੀ ਨਹੀਂ ਤੇਰੇ ਇੱਥੇ ਆਉਂਾਂ ਨੀਓ ਫੇਰ ਜੱਟ ਯੁੱਤੀ ਥੱਲੇ ਰੱਖੇ ਦੁਨੀਆਂ ਕਰੀਦੀ ਨਹੀਂ ਕਰੀਦੀ ਪਾਪੇ ਦੀ ਆ ਪਾਪੇ ਤੇ ਯੁੱਤੀ ਥੱਲੇ ਰੱਖੇ ਦੁਨੀਆਂ